ਗੱਲ ਸਮਝ ਆਈ ਹੈ ਨਿਰਾਕਾਰੀ ਮਾਇਆ ਦੀ ਜਿਹੜੀ ਸਮਝ ਆਏ ਉਹਨੂੰ ਰਿਤ ਕਹਿੰਦੇ ਨੇ ਸਿੱਧੀ ਗੱਲ ਨੇ ਨਿਰਾਕਾਰੀ ਸੋਝੀ ਨੂੰ ਇੱਥੇ ਨਿਰਾਕਾਰੀ ਸੋਝੀ ਉਹ ਮਿਲਦੀ ਹੈ ਸੱਚਖੰਡ ਤੋਂ ਦੂਈ ਤਾਂ ਇੱਥੋਂ ਹੀ ਮਿਲਦੀ ਹੈ ਸਾਹਮਣੇ ਇਹ ਤੁਹਾਡੇ ਦੂਈ ਤਾਂ ਤੂੰ ਕਿੰਨੇ ਸਿੱਧੇ ਤੇ ਤੂੰ ਫਿਰ ਸੋਝੀ ਨਹੀਂ ਕਿਥੋਂ ਮਿਲਦੀ ਕਿਸ ਨੂੰ ਕਰਮ ਮਿਲਾਇ ਨਹੀਂ ਠਾਕ ਰਹੀ ਪਰ ਜਿਹਨੂੰ ਮਿਲਦੀ ਹੈ ਤੇਰੀ ਕਿਰਪਾ ਕਰਮ ਦਾ ਹਰ ਤੇ ਕਿਰਪਾ ਤੇ ਬੰਦੇ ਕਿ ਮੈਂ ਜਿਹੜਾ ਤੇਰੀ ਅਦ੍ਰਸ਼ੀ ਹੋ ਜਾ ਨਾਮ ਮਰਦਾ ਜੇ ਤੂੰ ਰੋਛੇ ਜੇ ਜਿਹੜਾ ਤੂੰ ਖੁਸ਼ ਹੋ ਜਾ ਨਾਮ ਮਿਲਿਆ ਨਹੀਂ ਠਾਕ ਕਿਹਦੇ ਤੇ ਤੇਰੀ ਕਿਰਪਾ ਹੋ ਜਾਵੇ ਆ ਡੋਨਟ ਨੂ ਮਿਲਦਾ ਫਿਰ ਉਹਨੂੰ ਰੋਕ ਨਹੀਂ ਸਕਦਾ ਕੋਈ ਪੰਡਤ ਵੀ ਰੋਕ ਸਕੇ ਕਾਸ਼ੀ ਦੇ ਵਿੱਚ ਬੈਠੇ ਵੀ ਰੋਕ ਉਹਨੂੰ ਰਬਾਸ ਨੂੰ ਨਾਮ ਕਿਉਂ ਮਾਇਆ ਵਨ 라 ਦਿੰਦਾ ਰਾਹ ਦੇ ਵਿੱਚ ਨਾ ਦੇਣ ਦਿੰਦੇ ਉਹ ਇਹੋ ਨਾਲੇ ਤਾਂ ਸਿਮਰਤਿਆਂ 'ਚ ਲਿਖਿਆ ਸੀ ਵੀ ਨੀਚ ਨੂੰ ਨਾ ਨੀਚ ਜਿਹੜਾ ਭਗਤੀ ਪਰਫੁੱਲਤ ਨੀ ਹੋ ਸਕਦੀ ਨੀਚ ਜਿਆ ਦਾ ਨਾਮ ਨਹੀਂ ਜਪ ਸਕਦਾ ਉਹ ਤਾਂ ਨੀਚ ਜਿਆ ਤਕਾਸ਼ੀ 'ਤੇ ਬੈਠਾ ਫਿਰ ਰੋਕ ਦਿੰਦਾ ਫਿਰ ਰੋਕੇ ਦੋਲਦੇ ਅਰ ਪ੍ਰਚਾਰ ਕਰਦੇ ਸੀ ਸਿਮਰਤਿਆਂ ਦਾ ਤਾਂ ਲਿਖੀ ਹੈ ਗੱਲ ਇਹ ਗੱਲ ਲਿਖੀ ਕਿ ਉਹ ਸਵਾਲ ਹੈ ਕਰਮ ਮਿਲ ਨਹੀਂ ਠਾਕ ਰਹੀਆਂ ਉਹਨਾਂ ਦਾ ਲਿਖਿਆ ਸੀ ਬੰਨ ਲਾਇਆ ਤਾਂ ਪੱਥਰ ਦਾ ਪੰਡਿਤ ਬ੍ਰਾਹਮਣ ਦੇ ਬਿਨਾ ਕਿਸੇ ਨੂੰ ਗਿਆਨ ਨਹੀਂ ਹੋ ਪਰਮੇਸ਼ਰ ਤੋਂ ਮਿਲਦਾ ਉਹ ਰੋਕ ਦਿੰਦੇ ਫਿਰ ਜੇ ਉਹਦੇ ਉਹਦੀ ਕਿਰਪਾ ਹੋ ਜਾ ਕਿਸੇ ਤੇ ਉਹ ਨਹੀਂ ਰੋਕ ਸਕਦਾ ਉਹਨੂੰ ਕੋਈ ਗੱਲ ਇਹਦਾ ਮਤਲਬ ਕਰਮ ਮਿਲ ਨਹੀਂ ਉਸ ਕਿਸੇ ਤੋਂ ਰੁਕੀਆਂ ਨਹੀਂ ਅਜੇ ਤੱਕ ਉਹਦੀਆਂ ਦਤਾਂ ਉਹ ਤਾਂ ਨੇੜੇ ਰਹਿੰਦੇ ਸੀ ਰੋਜ਼ ਦੇਵਤੇ ਤੇ ਰੋਜ਼ ਮੰਦਰ ਦੇ ਦੋ ਵੇਲੇ ਤਿੰਨ ਵੇਲੇ ਪੂਜਾ ਕਰਦੇ ਤੇ ਉਹ ਰੋਕ ਦਿੰਦੇ ਫਿਰ ਵੀਰ ਨੂੰ ਨਾ ਵੇਲੇ ਕਬੀਰ ਨੂੰ ਨਾ ਵੇਲੇ ਇਹ ਤਾਂ ਸਾਰੇ ਨੀਚ ਨੇ ਰੋਕ ਕੇ ਫਿਰ ਉਹ ਚੈਲੰਜ ਆ ਸਾਰਿਆਂ ਨੂੰ ਬੜ ਬਹੁਤ ਡੁੰਗਾ ਚੈਲੰਜਾ ਗੁਰਮਤ ਨੇ ਕੀਤਾ ਉਹ ਦਸਮ ਬਾਸ਼ ਆਲੇ ਦਸਪਾਸਟ ਪੜਦਾ ਚੱਕਤਾ ਸਿਆਪਾ ਤਾਂ ਹੋ ਗਿਆ ਇਹ ਸਤਵੇਂ ਪਤਾਲ ਦੀ ਗੱਲ ਕਹੀ ਹੋਈ ਹੈ ਬੁਝਣ ਵਾਲਾ ਬੁਝੂਗਾ ਉਹਨੇ ਪਤਾ ਨਾਲੇ ਪੜਦਾ ਹੀ ਚੱਕਦਾ ਪੜਦਾ ਚੱਕਦਾ ਹਾਕਾਰ ਹੋ ਗਿਆ ਜਮੀਨ ਦੇ ਥੱਲੇ ਕਿੰਨੀ ਗੈਸ ਭਈ ਹੈ ਜੇ ਬਾਹਰ ਹੈ ਦਰਿਆ ਚੱਲ ਬੈ ਅਗਲਾ ਨਿਆ ਮੈਂ ਤਾਂ ਸਾਰੀ ਨੂੰ ਜੇ ਥੱਲੇ ਵੀ ਗਿਆ ਤਾਂ ਰਿਆ ਚਲਾਦੀ ਸੁਮੰਦਰ ਤੇ ਜਿੰਨੀ ਠੱਠੀ ਚ ਪਈ ਐ ਉਹਦਾ ਅਗ ਬੜ ਲੂਗੀ। ਇਹ ਕਰਕੇ ਉਹਨਾਂ ਨੇ ਥੱਲੇ ਟੱਕ ਕੇ ਰੱਖਿਆ ਸੀ ਇਹ। ਪ੍ਰਗਟ ਕਰਕੇ ਛਿੜਕ ਬਿਲੀ ਲਾਤੀ। ਥੀਲਿਆ ਸੁਝੜ ਪਿਆ। ਵਿੱਚ ਇਨੀ ਪੈਦਾ ਉੱਤੇ ਦਾ ਸਾਰਾ ਦਸੂਰਾਂ ਦੇ ਵਿੱਚ ਪ੍ਰਗਟ ਕਰਕੇ ਅਗ ਲਾਸਤੀ ਫਲਾਤਾ ਸਾਰਾ ਹੀ। ਕੋੜਾ ਦੇ ਚਾਰ ਦੇ ਬਰਾਬਰ ਕਰਤੇ ਇੱਥੇ ਕੁਝ ਹੋਰ ਤਰੀਕੇ ਨਾਲ ਬਰਾਬਰ ਕਰ ਮੈਲੇ ਨਹੀਂ ਠਾਕ ਹਾਂ ਰਾਹੀਆ ਹਾਂ ਰਾਹੀਆ ਬਰਾਬਰ ਨੇ ਸਭ ਜਿਹਨੂੰ ਮਰਜ਼ੀ ਦਵੇ ਜਿਹਨੂੰ ਮਰਜ਼ੀ ਨਾ ਦਵੇ ਤੁਹਾਡਾ ਲਿਖਿਆ ਸਭ ਗਲਤ ਹੈ ਇਹ ਤਾਂ ਘਹਿराईत ਗੱਲ ਕੀਤੀ ਹੋਈ ਹੈ ਇਸ਼ਾਰੇ ਨਾਲ ਉਜੀ ਆਪਣੇ ਵਾਪਸ ਲੈ ਲਓ ਲਖਤਾ ਕਦੋਂ ਲੈਣੇ ਨੇ ਵਾਪਸ ਉਹ ਤੱਕ ਨਹੀਂ ਵਾਪਸ ਲੈਣ ਨੂੰ ਤਿਆਰ ਬਗਾਵਤ ਹੈ ਉਹਨਾਂ ਦੇ ਖਿਲਾਫ ਹੈ ਗੁਰਬਾਣੀ ਹੈ ਤਾਂ ਹੀ ਤੋਂ ਖਲਾਫ ਨੇ ਗੁਰਬਾਣੀ ਦੇ ਖਲਾਫ ਕਿਉਂ ਖਲਾਫ ਰਿਹਾ ਬਗਾਵਤ ਹੈ ਉਹਨਾਂ ਨੇ ਸਾਰੇ ਗ੍ਰੰਥਾਂ ਦੇ ਖਿਲਾਫ ਉਹ ਤਾਂ ਤੋਂ ਤੋਂ ਕਹਿੰਦੇ ਨੇ ਆਏ ਫਲਨ ਅਦਰੋਂ ਸਮਝਾਣ ਦੇ ਰਹੇ ਵੇ ਬਗਾਵਤ ਸਾਡੇ ਵਾਲੇ ਵੀ ਠੀਕ ਨੇ ਵੀ ਠੀਕ ਹੈ ਜੇ ਇਹ ਠੀਕ ਦਾ ਤੁਹਾਡੇ ਵਾਲੇ ਨਹੀਂ ਠੀਕ ਫਿਰ ਜੇ ਤੁਹਾਡੇ ਵਾਲੇ ਨਹੀਂ ਠੀਕ ਫਿਰ ਇਹ ਨਹੀਂ ਠੀਕ ਇੱਕ ਨੂੰ ਠੀਕ ਕਰੋ ਅਜੀ ਆਖਣ ਵਾਲਾ ਕਿਆ ਵਿਚਾਰਾ ਉਹ ਜਿਹੜਾ ਕਹਿੰਦਾ ਮੈਂ ਆਖਣ ਵਾਲਾ ਆਪਣੀ ਗੱਲ ਕਰਦੇ ਸੀ ਉਹ ਜਿਹੜਾ ਉਹਦੀ ਵਡਿਆਈ ਆਖ ਰਹੇ ਉਹ ਤਾਂ ਕੀ ਆ ਵਿਚਾਰਾ ਉਹ ਤਾਂ ਕੁਝ ਵੀ ਨਹੀਂ ਹੁੰਦਾ ਮਨੁੱਖਾ ਛੋਡੇ ਵਰਗਾ ਯਾਹੋ ਲਾ ਆ ਗਾਲ ਦਾ ਰੌਲਾ ਅੱਜ ਰਬਦਾਸ ਰੌਲ ਰਬਦਾਸ ਗੁਰੂ ਐ ਕਿ ਨਾਨਕ ਗੁਰੂ ਐ ਇਸ ਗੱਲ ਦਾ ਰੌਲਾ ਐ ਹੁਣ ਜਿਹਨਾਂ ਨੂੰ ਅਕਲ ਹੁੰਦੀ ਰੌਲਾ ਕਿਉਂ ਪੈਂਦਾ ਇਸ ਗੱਲ ਦਾ ਆਖਣ ਵਾਲਾ ਤਾਂ ਵਿਚਾਰਾ ਉਹਦਾ ਚਾਰਾ ਹੀ ਕੁਝ ਨਹੀਂ ਹੋਇਆ ਉਹਦੇ ਹੱਥ 'ਚੇ ਕੁਝ ਨਹੀਂ ਆਖਣ ਵਾਲੇ ਦੇ ਜਿਹੜਾ ਗੁਰਬਾਣੀ ਰਚ ਰਿਆ ਉਹਦੇ ਹੱਥ ਵਿੱਚ ਕੱਖ ਦੀ ਹੈ ਜਿਵੇਂ ਬੁਲਾਉਂਦਾ ਜਿਵੇਂ ਬੋਲਦਾ ਤੁਸੀਂ ਕਹਿੰਦੇ ਗੁਰੂ ਹੈ ਰਵਿਦਾਸ ਗੁਰੂ ਹੈ ਨਹੀਂ ਕਮ ਰਵਿਦਾਸ ਗੁਰੂ ਹੈ ਗੁਰੂ ਨਾਨਕ ਦੇਵ ਇਹ ਸਾਰੇ ਗੁਰੂ ਨੇ ਸਾਰੇ ਦਾਸ ਨੇ ਸੱਚ ਬੋਲਣ ਨੂੰ ਨਹੀਂ ਤਿਆਰ ਕੋਈ ਵੀ ਹੈ ਸੱਚ ਬੋਲਣ ਤੋਂ ਡਰੇ ਹੈ ਨਾ ਬੇਈਮਾਨ ਨੇ ਨਾ ਸਾਰੇ ਸਾਜਣਾ नाम कोई ਖੜਾ खड़ा, ਤੇ ਕੋਈ कोई भी ਹੈ है, अपनी अपनी ਸੇਕਦੇ ਨੇ ਸਾਰੇ ਅੱਖੜ ਵਾਲਾ ਕਿਆ ਬੇਚਾਰਾ ਸਿਫਤ ਹੀ ਭਰੇ ਤੇਰੇ ਪੰਡਾਰਾ ਓਏ ਅੱਖ ਤੇਰੇ ਤਾਂ ਬਨਾਲ ਸਿਫਤਾ ਨਾ ਭਰੇ ਪਏ ਨੇ ਉਹਦਾ ਜਿੰਨਾ ਤੂੰ ਬਰੋਲੋ ਉਹਨਾਂ ਨੂੰ ਬੋਲ ਦਿੰਦਾ ਉਹਦੇ ਅੱਤੇ ਕੁਝ ਨਹੀਂ ਆਇਆ ਅੱਖੜ ਜੇ ਤੂੰ ਦੇ ਤੇ ਸੇਕਾ ਚਾਰਾ ਸਿਰਤੀ ਭਰੇ ਤੇਰੇ ਪੰਡਾਰਾ ਸਿਰਤੀ ਭਰੇ ਤੇਰੇ ਬਨਾਰਾ ਜੇ ਤੂੰ ਦੇਂ ਤੇ ਸੇਕਾ ਚਾਰਾ ਜੇ ਤੂੰ ਦੇਂ ਤੇ ਸੇਕਾ ਚਾਰਾ ਕਿਸੇ ਦਾ ਚਾਰਾ ਨਹੀਂ ਚੱਲਦਾ ਬੇਜੀ ਨੂੰ ਤੂੰ ਦੇ ਦੇਵੇਂ ਉਹ ਜੀ ਨੂੰ ਦੰਨਾ ਚਾਰਾ ਵੀ ਕੋਈ ਨਹੀਂ ਹੈ ਮੈਂ ਵੀ ਨਹੀਂ ਲੈ ਸਕਦਾ ਤੂੰ ਵੀ ਨਹੀਂ ਲੈ ਸਕਦਾ ਉਹ ਵੀ ਨਹੀਂ ਲੈ ਸਕਦਾ ਲਿਆ ਵੀ ਨਹੀਂ ਕਿਸੇ ਨੇ ਤਾਂ ਮੁਰਜੀ ਹੈਨ ਬਾਲਕ ਦੀ ਕੋ ਕੋ ਦਾਤਾ ਦਾਤ ਰੱਖੀ ਹਤ ਆਪਣੇ ਜੈ ਭਾਵੇ ਤੇ ਲੇ ਲੋ ਕਹਰਾ ਦਸੁਖੀ ਤੇ ਜਿਵੇਂ ਨਾਨਕ ਨੂੰ ਮਿਲਿਆ ਅਵਦਾਸ ਨੂੰ ਤਾਂ ਨਾਨਕ ਨੂੰ ਪਹਿਲਾਂ ਮਿਲੀ ਹੈ ਕਬੀਰ ਨੂੰ ਤਾਂ ਨਾਨਕ ਨੂੰ ਪਹਿਲਾਂ ਮਿਲੀ ਹੈ ਨਾਨਕ ਨੇ ਤਾਂ ਕਬੀਰ ਅਵਦਾਸ ਦੀ ਬਾਣੀ ਪੜ੍ਹੀ ਹੈ ਸ਼ਰਮ ਕਰਨੀ ਚਾਹੀਦੀ ਹੈ ਕੋਈ ਸ਼ਰਮ ਸਾਰੇ ਰੂਏ ਣਾਲੇ ਗਨੂ ਜਾਤ ਨਹੀਂ ਰੁੱਦੀ आदमी कोई बाणस की धब्बे जात नाले जात लगी बैठे हो रोजगार दी जात इकट्ठी है सब बदलदा फिरे होया सब खोरी है, कुछ नहीं है पीछे अपनी बड़ाई है भी असि फबनी ओ भगतान होए तेरे दास दासा आ रहे रे कुर्बान जी ਓਏ ਤੇਰੇ ਦਰਸ਼ਨ ਦਾਸਾ ਜਿਹੜੇ ਤੇਰੇ ਪਹਿਲੇ ਦਾਸ ਨੇ ਨਾ ਰਬਦਾਸ ਦਾਸ ਹੈ ਜਿਵੇਂ ਕਬੀਰ ਦਾਸ ਹੈ ਭਗਤ ਨੇ ਮੈਂ ਉਹਨਾਂ ਦਾ ਵੀ ਦਾਸ ਬਨਾਨ ਕੇ ਕਹਿੰਦੇ ਓਏ ਤੇਰੇ ਦਰਸ਼ਨ ਦਾਸਾ ਐਡੇ ਮਹਾ ਸ਼ੈਤਾਨ ਨੇ ਇੱਕ ਪੰਕਤੀਆਂ ਲਗੋਲੀਆਂ ਜਾਣ ਕੇ ਯਾ ਭੋਰਖ ਨੇ ਸਮਝ ਨਹੀਂ ਗਈ ਯਾ ਤਾਂ ਨੇ ਯਾ ਸ਼ੈਤਾਨ ਨੇ نہ شیطان چنگے نے نہ مورخ چنگے دے دوہی چنگے قربانی واسطے قربت دے پرچار واسطے شیطان بھی ٹھیک نہیں ہے مورخ بھی ٹھیک نہیں ہے نہ مورخ نہ کم ہے نہ شیطان دا کم ہے اے شیطان نے تو عینوں کر مار کڈو اے مورخ نے تو سمجھا دو مور گرو رکھ لیا ہوندا مورخاں نیں کچھ ہوندا مورخ تا قابل ہوندا سمجھا دی دا ہوندا شیطان نو نکال رکھیا ہوندا شیطان نو مار کڈ دی تے ਕੋ ਸੈਤਾਨ ਜਾਣਦਾ ਹੁੰਦਾ ਜਾਣ ਕੇ ਕਹਿਣਾ ਹੁੰਦਾ ਸੈਤਾਨ ਤਾਂ ਜਾਣਦਾ ਹੁੰਦਾ ਜਾਣ ਕੇ ਕਹਿਣਾ ਹੁੰਦਾ ਤਾਂ ਕੋਈ ਇਲਾਜ ਨਹੀਂ ਮੂਰਖ ਦਾ ਇਲਾਜ ਉਹ ਸਮਝਿਆ ਸਮਝਣ ਤੇ ਪਤਾ ਲੱਗੇ ਨਾਨਕ ਸਚ ਸਵਾਰਨ ਹਾਰਾ ਨਾਨਕ ਸੱਚ ਸਵਾਰਨ ਜੇ ਕੁਝ ਸਿਮਰਨੇ ਸੱਚ ਨਾਲ ਸਿਮਰਨਾ ਨਹੀਂ ਸਿਮਰਨਾ ਕਿਸੇ ਦਾ ਕੱਖ ਨਹੀਂ ਸਿੱਖੀ ਦਾ ਸੱਚ ਬਿਨਾ ਕੱਖ ਨਹੀਂ ਸਿਮਰਨਾ ਸਿੱਕੀ ਖੜੀ ਸੱਚ ਤੇ ਸਿੱਕੀ ਦੀ ਨਿਯੋਅ ਸੱਚ ਤੇ ਜਿਹੜੀ ਕਿ ਸੱਚ ਛੱਡ ਦਿੰਦਾ ਸਾਰਿਆਂ ਨੂੰ ਰੌਲਾ ਸੱਚ ਛੱਡੇ ਤੋਂ ਪਿਆ ਹੋਇਆ ਸੱਚ ਤੇ ਕੋਈ ਵੀ ਖੜਾ ਸੱਚ ਤੇ ਖੜਨਾ ਬਹੁਤ ਨਹੀਂ ਤਾਂ ਸੰਗਤ ਸੱਚੇ ਸੱਚ ਤੇ ਖੜ ਜੂਗੀ ਸੰਗਤ ਸੱਚ ਤੇ ਖੜ ਜੂ ਇਹਨਾਂ ਨੂੰ ਇਹਨਾਂ ਨੂੰ ਉਹ ਜਦੋਂ ਹੁੰਦਾ ਨਾ ਕਹਦਾ ਉਹ ਪੱਤੇ ਆ ਜਾਂਦੇ ਪਾਣੀ ਦੇ ਉੱਤੇ ਇਹਨੂੰ ਵਾਸੜ ਦਣਗੇ ਕੱਢ ਕੇ ਛਿੱਤਿਆਂ ਨੂੰ ਪੁੱੜ लसी ਲੱਸੀ ਲੱਸੀ ਰੱਖ ਲੈਣਗੇ ਛਿੱਤਿਆਂ ਨੇ ਜਿਹੜੀਆਂ ਪੁਲਕੇ ਬਾਹਰ ਕੱਢ ਦਾਂਗੇ ਇਹਨਾਂ ਨੂੰ ਹੋਰ ਕੀ ਹੈ ਸਗਰ ਬਾਹਰ ਕੱਢ ਦੂ ਸੱਚ ਦੇ ਬਿਨਾ ਕੁਛ ਨਹੀਂ ਸਬਲਣਾ ਫੈਸਲਾ ਨਾਨਕ ਦਾ ਸੱਚ ਸਵਾਰਣ ਹਾਰਾ ਜਿਹੜਾ ਸੱਚ ਦਾ ਵਿਰੋਧ ਕਰੂਗਾ ਸੱਚ ਦਾ ਵਿਰੋਧ ਹੋਈ ਨਹੀਂ ਸਕਦਾ ਸੱਚ ਦਾ ਆਦ ਸੱਚ है, ਜੁਗਾਦ ਸੱਚ है, ਜਿਹੜਾ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਂ ਕੋਈ ਵੀ ਸੱਚ ਉਹ ਹੀ ਸਵਾਰਨ ਹੋਣਾ ਹੈ ਜਿਹੜਾ ਸੱਚ ਤੇ ਖੜ ਜਾਂਦਾ ਫੇ ਪ੍ਰਭ ਕਾਜ ਸਵਾਰੇ ਆਏ ਫੇ ਉਹਦੇ ਕਾਜ ਸਵਾਰਦਾ ਸੱਚ ਕਾਣ ਲੈ ਜੇ ਤੇਰੀ ਜਦੋਂ ਮੇਰੀਆਂ ਤੇਰੀ ਮਿਟ ਜਾਂਦੀ ਐ ਮੈਂ ਕਰ ਪ੍ਰਭ ਕਾਲ ਸਵਾਰਿਆ ਐ ਤੇਰੀਆਂ ਮੇਰੀਆਂ ਨਹੀਂ ਰਹੀ ਫਿਰ ਸੱਚ ਤੇ ਆਉਂਦਾ ਜਦੋਂ ਜਦ ਵੇਰੀ ਗੱਲ ਕਹੀ ਹੋਈ ਤੇਰੀ ਗੱਲ ਕਹੀ ਹੋਈ ਮੈਂ ਆਇਆ ਸੀ ਤੂੰ ਕਿਉਂ ਨਹੀਂ ਸੀ ਆਇਆ ਸੀ ਇੱਥੇ ਅਜਾ ਤਾਂ ਬਹੁਤ ਦੂਰ ਹੋ ਤੁਸੀਂ ਇਹ ਤਾਂ ਹੁਜਤਾ ਨੇ ਹੁਜਤਾ ਇਹ ਤਾਂ ਜਿਹੜੀ ਚਤਰਾਈ ਐ ਨਾ ਕਬੀਰ ਚਤਰਾਈ ਅਤਕੜੀ ਚਤਰਾਈ ਤਾਂ ਅੱਟ ਇੱਕ ਅਤ ਜੋ ਅਤ ਚੱਕੀ ਆਪਾਂ ਕਹਿੰਦੇ ਹੱਤ ਚੱਕਲੀਰ ਚਤਰਾਈ ਵਾਲੇ ਦੀ ਹੱਤ ਚੱਕੀ ਹੋਈ ਹੁੰਦੀ ਐ ਹਰ ਜੱਪ ਹਿਰਦੇ ਮੇਂ ਤਾਂ ਤੇਰੇ ਹਿਰਦੇ ਚ ਇਹਨੂੰ ਜਾਣ ਲੈ ਸੱਚ ਤਾਂ ਤੇਰੇ ਹਿਰਦੇ ਚ ਇਹਨੂੰ ਜਾਣ ਲੈ ਅੰਤਰਾਤਮਾ ਦੀ ਆਵਾਜ਼ ਤੇ ਪੁੱਛ ਲੈ ਕੀ ਐ ਸੱਚ ਕੀ ਐ ਝੂਠ ਬਾਹਰੋਂ ਪੁੱਛਣ ਦੀ ਕੀ ਲੋੜ ਐ ਹੇ ਆਸਾ ਮਹੱਲਾ ਪਹਿਲਾ ਆਖਾ ਜੀਵਾ ਵਿਸਰੇ ਮਰ ਜਾਉ ਆਖਾਂ ਜੀਵਾ ਜੇ ਮੈਂ ਸੱਚਾ ਖਾਂ ਜਿਹੜਾ ਸੱਚ ਜੁੜਿਆ ਰਹਿੰਦਾ ਸੱਚ ਨਾਲ ਸੱਚ ਆਖਦਾ ਸੱਚ ਬੋਲਦਾ ਸੱਚ ਖੜਦਾ ਸੱਚ ਪਹਿਨਦਾ ਉਹਨੂੰ ਕੋਈ ਮਾਰ ਨਹੀਂ ਸਕਦਾ ਉਹਨਾ ਜਦ ਹੀ ਮਰਿਆ ਨਾ ਉਹਨੂੰ ਕੋਈ ਮਾਰ ਸਕਦਾ ਮਰਦਾ ਕੌਣ ਹੈ ਵਿਸਰਜੂੜ ਵਰਦਾ ਝੂਟ ਸਾਚੇ ਨੂੰ ਵਿਸਰ ਤਾਂ ਵੀ ਮਰ ਜਾਂਦਾ ਹੈ ਤਾਂ ਮਰ ਨਹੀਂ ਮਰਦਾ ਜਾਂ ਸੱਚ ਸੱਚ ਛੁੱਟ ਜਾਂਦਾ ਹੱਥ ਜਗੀਰਾਂ ਦੇ ਨਾਂ ਤੇ ਝੂੜ ਰਹਿ ਜਾਂਦਾ ਹੈ ਸਰੀਰ ਰਹਿ ਜਾਂਦਾ ਹੱਥ 'ਚ ਜੇਦਾ ਹਿਰਦੇ ਵਿੱਚ ਇਹਦੇ ਹਰ ਜਾਪ ਹਿਰਦੇ ਬਾਵੇਂ ਜੇਦਾ ਇਹਦਾ ਧਿਆਨ ਹਿਰਦੇ 'ਚ ਰਹਿੰਦਾ ਫਿਰ ਤਾਂ ਸੱਚ 'ਚ ਰਹਿੰਦਾ ਜਾਦੇ ਤਿਰਕੁੜੀ ਜਾ ਜਾਂਦਾ ਜਦੈ ਸਰੀਰ ਨਾਲ ਜੁੜ ਜਾਂਦਾ ਝੂਠ ਨਾਲ ਜੁੜ ਜਾਂਦਾ ਦਿਮਾਗ ਜਾਏ ਆਪਣੇ ਦਿਮਾਗ ਦੇ ਕੰਮ ਲੈਣ ਲੱਗਿਆ ਦਿਮਾਗ ਜਦ ਆਇਆ ਆਪਣੀ ਮਰਜ਼ੀ ਚੱਲ ਪਈ ਦਰਦ ਲੱਗ ਗਿਆ ਆਪਣਾ ਭਣ ਹਿਰਦੇ ਚ ਗਿਆ ਗੁਰਗਾੜ ਉਹ ਗੁਰਗੇ ਪਾਣਾ ਹਿਰਦੇ ਚ ਹਰ ਜੱਪ ਹਿਰਦੇ ਮਾਹ ਗੁਰਗਾ ਪਾਣਾ ਉੱਥੇ ਜਿਹੜੇ ਗੁਰਗੇ ਪਾਣੇ ਚੱਲੇ ਹਿਰਦੇ ਚ ਬੈਠੇ ਜਿਹੜੇ ਦਿਮਾਗ ਦੇ ਵਿੱਚ ਬੈਠੇ ਨੇ ਨਾ ਦਲੀਲਾਂ ਰੋਜ਼ ਘੜਦੇ ਨੇ ਨਵਨਵੀਆਂ ਇਹ ਸ਼ੈਤਾਨ ਨੇ ਸਾਰੇ ਇਹ ਆਪਣੇ ਬਾਣੀ ਚੱਲਣ ने ਨੇ ਸਾਰੇ ਤਾਂ ਇਹ ਤਾਂ ਵਿਛੜੇ ਨੇ ਉਹ ਚੋਟਾਂ ਦਾ है ਰੌਲਾ ਪੈਂਦਾ ਇਹ ਜਿਹੜਾ ਪਾਉਂਦੇ ਨੇ ਵਿਛੜ ਚੋਟਾਂ ਖਾਏ ਵਿਛੜਿਆ ਨੇ ਝੋਟ ਪੈਂਦੀ ਆਖਣ ਔਖਾ ਸੱਚਾ ਨਾ ਪਰ ਇਹ ਗੱਲ ਨਾਲ ਹੈ ਇਹ ਵੀ ਨਾਲ ਹੈ ਸੱਚ ਆਖਣਾ ਔਖਾ ਬਹੁਤ ਹੈ ਸੱਚ ਆਖਦੇ ਬਾਫੜ ਵਾ ਜਾਂਦਾ ਸੇ ਖਬਰوں ਵੀ ਲੱਗਦਾ ਤੇ ਦੂਜਿਆਂ ਨੂੰ ਵੀ ਲੱਗਦਾ ਐਸਾ ਸੇਖ ਲੱਗਦਾ ਸਭ ਕੁਝ ਝੂਠ ਅੰਦਰ ਨਾਲ ਜਾਂਦਾ ਜੇ ਕੋਲ ਹੋਵੇ ਨਾ ਕੁਝ ਜੇ ਤਾਂ ਪਹਿਲਾਂ ਹੀ ਸੜ ਦਵੇ ਬਾਹਰ ਜਾਣ ਵਾਲੀਏ ਚੀਜ਼ਾਂ ਜੇ ਉਹ ਜਿਹੜੇ ਕਮਰੇ ਤੁਸੀਂ ਸਿੱਖਣਾ ਨਾ ਉੱਥੇ ਮਿੱਟੀ ਦੇ ਤੇ ਹਲਦੇ ਪਟੋਲ ਦੇ ਪੀਪੇ ਰੱਖਿਆ ਉਹਨਾਂ ਕੇ ਫੇਰ ਤੁਸੀਂ ਮਰ ਲਈਏ ਇਹ ਜਿਹੜੇ ਕਮਰੇ ਤੁਸੀਂ ਬੈਠੇ ਹੋ ਬਹੁਤੀ ਠੰਡਾ ਆਪਾਂ ਨੇ ਉੱਥੇ ਕੋਈ ਇੰਗਿੱਠੀ ਵਗੈਰਾ ਕੋਈ ਚੀਜ਼ ਰੱਖ ਕੇ ਨਿਕ ਪੈਦਾ ਕਰਨ ਉੱਥੇ ਪਟੋਲ ਆ ਗੈਸ ਕੋਲ ਐਸੀ ਚੀਜ਼ ਰੱਖਣ ਦੀ ਲੋੜ ਨਹੀਂ ਹੁੰਦੀ ਅੱਗ ਫੜ ਲੈਣੀ ਜੇ ਤੁਸੀਂ ਸੱਚ ਬੋਲ ਹਿਰਦੇ 'ਚ ਕੋਈ ਐਸੀ ਚੀਜ਼ ਨਹੀਂ ਰੱਖਣੀ ਮਾਇਆ ਦੀ ਜਿਹੜੀ ਅੱਗ ਫੜ ਲਵੇ ਇੱਕ ਵੜ ਲੰਮੀ ਨਹੀਂ ਜੀ ਜਲ ਸਾਰੀ ਪਹਿਲੇ ਵਾਰ ਘੜ ਦੋ ਇਹਨੂੰ ਪਰ ਸੱਚ ਤਾਂ ਚੇਤਨਾ ਵੜਦਾ ਹੀ ਰਹੀ ਇੱਥੇ ਜਿੱਤੇ ਇਹ ਆਇਆ ਕੁਛ ਹੋਵੇ ਆਉਂਦਾ ਨਹੀਂ ਉਹ ਅਖਣੋਂ ਖਾਸਾ ਚਾਹਨਾ ਉਹ ਅਖਣੋਂ ਕੋ ਸੌਖੀ ਗੱਲ ਨਹੀਂ ਹੈ ਗੁਰਬਾਣੀ ਉਚਾਰਨ ਕਰਨੀ ਕੋ ਸੌਖੀ ਗੱਲ ਨਹੀਂ ਹੈ ਉਹ ਬਥੇਰੇ ਨੀਸ ਕਰਦੇ ਨੇ ਅਵਤਾਰ ਬਣ ਲੀ ਫਿਰਦੇ ਨੇ ਉਹ ਨੀਸ ਬਥੇਰੇ ਕਰਦੇ ਨੇ ਗੁਰਬਾਣੀ ਦੀ ਵਿਆਖਿਆ ਕਰਨੀ ਕੋਈ ਸੌਖੀ ਗੱਲ ਨਹੀਂ ਹੈ। ਕੋਈ ਕੋਈ ਗੱਲ ਹੈ। ਕੋਈ ਗੱਲ ਹੈ। ਜਿਹੜੇ ਕਵਿਤਾ ਲਿਖਦੇ ਨੇ ਸਮਝ ਕੇ ਹੀ ਲਿਖਦੇ ਨੇ। ਕਵਿਤਾ ਲਿਖਣਾ ਇੱਕ ਹੋਰ ਗੋੜ ਐਕਸਟਰਾ ਗੋੜ ਐ। ਸਮਝ ਲਿਆ। ਸਮਝੀ ਹੋਏ ਦਾ ਲਿਖੀ ਜਾ ਸਕਦੀ ਐ। ਚਾਹੇ ਵਾਰਤਾ ਵਾਰਤਕ ਤੌਰ ਤੇ ਲਿਖਦੋ ਚਾਹੇ ਕਵਿਤਾ ਜਿਵੇਂ ਲਿਖਦੋ। ਸੱਚ ਨੂੰ ਸਮਝਣਾ ਬਹੁਤ ਔਖਾ ਹੈ ਸਮਝੇ ਬਿਨਾਂ ਆਖਿਆ ਵੀ ਨਹੀਂ ਜਾ ਸਕਦਾ ਜੋ ਤੂੰ ਸਮਝ ਲਿਆ ਬੋਲ ਵੀ ਸਕਦਾ ਸਮਝੀ ਜੀ ਚੀਜ਼ੇ ਬੋਲੋ ਇਹ ਸਮਝਣਾ ਹੀ ਔਖਾ ਹੈ ਇਹ ਬਹੁਤ ਫਰੀਕ ਹੈ ਖੰਨੇ ਉ ਤਿੱਖੀ ਵਾਲੋ ਨਿੱਕੀ ਹੈ ਜਾਣਾ ਅੱਖਣ ਔਖਾ ਸੱਚਾ ਸੱਚਾ ਕੋਈ ਨਹੀਂ ਨਾ ਉਹ ਉਹ ਕਾ ਸੱਚੇ ਨਾਮ ਕੀ ਲੱਗੈ ਭੁੱਖ ਜੇ ਸੱਚੇ ਨਾਮ ਦੀ ਭੁੱਖ ਲੱਗਿਆ ਇਹਨੂੰ ਕਦੇ ਜੇ ਸੱਚੇ ਨਾਮ ਦੀ ਕਿਸੇ ਦੇ ਅੰਦਰ ਭੁੱਖ ਹੋਵੇ ਘੜੇ ਦੇ ਵਿੱਚ ਸੱਚ ਵਸਤੂ ਉਹੀ ਪਾਊਗਾ ਜਰੂਰ ਲੋੜ ਹੋਊਗੀ ਜੇ ਭੁੱਖਾ ਤਾਂ ਕੋਈ ਖਤਰੋ ਯੇ ਭੁੱਖੇ ਨਹੀਂ ਇਹ ਅੰਦਰ ਸੱਚੇ ਨਾਮ ਦੀ ਖਾਊ ਆਖੀ ਪਰ ਬਸੂ ਅੰਦਰੋਂ ਬੋਲਣ ਵੇਲੇ ਹੋਈ ਨਿਕਲੂ ਜਿਹੜੀ ਪਾਈ ਆ ਜੋ ਨਿਕਲੂਗੀ ਜਿਹੜੀ ਪਾਈ ਆ ਜਿਹਦੇ ਅੰਦਰ ਸੱਚ ਦੀ ਭੁੱਖ ਪਹਿਲਾਂ ਜਗਦੀ ਹੈ ਪਹਿਲਾਂ ਉਹ ਸੱਚ ਖਾਦਾ ਹੈ ਸੱਚ ਇਕੱਠਾ ਕਰਦਾ ਹੈ ਫੇਰ ਦਸਣ ਵੇਲੇ ਸੱਚ ਉਹਦੇ ਅੰਦਰੋਂ ਕੱਲਦਾ ਵਾ ਨਿਕਲਦਾ ਹੀ ਨਹੀਂ ਕਹਿੰਦਾ ਮਤਲਬ ਇੱਥੋਂ ਸ਼ੁਰੂ ਕੀਤੀ ਹੈ ਗੱਲ ਜਦੋਂ ਸੱਚੇ ਨਾਮ ਦੀ ਕਿਸੇ ਨੂੰ ਭੁੱਖ ਲੱਗਦੀ ਹੈ ਪਹਿਲਾਂ ਭੁੱਖ ਲੱਗਣੀ ਕਹੀਦੀ ਹੈ ਲੋੜ ਚਾਹੀਦੀ ਉਹਨੂੰ ਸੱਚੇ ਨਾਮ ਲੋੜ ਆ ਤਾਂ ਖੋਜੋ ਬਣੀ ਚੋ ਲੋੜੇ ਖੋਜ ਪੈਦਾ ਕਰਦੀ ਹੈ ਲੋੜ ਹੀ ਤੋਈ ਖੋਜ ਸ਼ੁਰੂ ਹੁੰਦੀ ਹੈ ਜੇਨ ਕੀ ਦੀ ਸਾਨੂੰ ਲੋੜ ਐਸੇ ਉਹਨੂੰ ਖੋਜਦੇ ਆ ਲੱਭਦੇ ਆ ਢੋਲਦੇ ਆ ਦੇ ਸਟੀ ਜਿਹੜੀ ਆ ਹੋਈ ਬਦਰੋ ਫਿਰ ਬਿੰਨ ਸਰ ਕੋਈ ਚੀਜ਼ ਪ੍ਰਗਟ ਤਾਂ ਹੁੰਦੀ ਹੈ ਆਜ਼ਾਦ ਤਾਂ ਹੁੰਦੀ ਹੈ ਡਿਸਕਵਰ ਤਾਂ ਹੁੰਦੀ ਹੈ ਜੇ ਲੋੜ ਹੈ ਜਿਹਨਾਂ ਨੂੰ ਨਾਮ ਦੀ ਲੋੜ ਪਈ ਉਹ ਫਿਰਦੇ ਰਹੇ ਕਬੀਰ ਨੂੰ ਲੋੜ ਭੁੱਖ ਲੱਗੀ ਵਿਆਹ ਕੋਲ ਰਹਾ ਅਗਰ ਗੁਰ ਗਿਆ ਖੋਜ ਲਿਆ ਜਾਗੇ ਬਗਰ ਰੱਦਾ ਜੋ ਗੁਰ ਅਰਦਾਸ ਨੂੰ ਗੁਰਮਗਦ ਨੂੰ ਲੋੜ ਸੀ ਫਿਰਦੇ ਸੀ ਕਸਤੂਰੀ ਆਲੇ ਮਰਗਮੋਂ ਫਿਰਦੇ ਸੀ ਇਹ ਨਹੀਂ ਪਤਾ ਸੀ ਕਸਤੂਰੀ ਮੇਰੇ ਅੰਦਰ ਹੈ ਕਸਤੂਰੀ ਆਲੇ ਮਰਗਮੋਂ ਫਿਰਦੇ ਸੀ ਬਾਹਰ ਟੋਲਦੇ ਪਰ ਇਹ ਨਹੀਂ ਸੀ ਪਤਾ ਜਦੋਂ ਗਏ ਨਾ ਸਿਆਣੇ ਕੋਲ ਕਹਿੰਦੇ ਕਸਤੂਰੀ ਨਹੀਂ ਆਉਂਦੀ ਐ ਨਾ ਸਮੈਲ ਉਹ ਤੇਰੇ ਅੰਦਰ ਹੈ ਬਾਹਰ ਦਿਖਾਤੀ ਉਹਨੂੰ ਬੱਤੇ ਅੱਗੇ ਜੋੜ ਕੇ ਅੰਦਰ ਜੋੜ ਤੇ ਆਪਣੀ ਉਹ ਭੁੱਖ ਆ ਵੀ ਅੰਦਰੇ ਸੀ ਨਾਮ ਵੀ ਅੰਦਰੇ ਸੀ ਜਿਹੜੀ ਚੀਜ਼ ਦੀ ਭੁੱਖ ਆ ਵੀ ਅੰਦਰੇ ਆ ਨਾ ਉਹਨੇ ਦੀ ਅੰਮ੍ਰਿਤ ਪ੍ਰਭ ਨਾਮ ਦੇਹੀ ਮੇਸ ਦਾ ਉਹ ਭੁੱਖ ਵੀ ਅੰਦਰੇ ਆ ਉਹ ਨਾਮ ਵੀ ਅੰਦਰੇ ਆ ਬਾਹਰ ਨਹੀਂ ਆ ਹਰ ਜੱਪ ਹਿਰਦੇ માં ਹਿਰਦੇ ਦੇ ਵਿੱਚ ਹੈ ਜਿਹਨੂੰ ਜੱਪਣਾ ਸਮਝਣਾ ਜਾਣ ਅੰਦਰੇ ਆ 20 टोले से भरम भलाई बस ओ टोल दे सी बाहर जन्ना चल रही सी पता साचे नाम की लागा है भूख जे भूख लगि आवे ओ तो भूखा है खाए चली है दुख एक निशानी है पहला जिने दुख ने ना संसारी ओ भूखे खा जल्दी है ओ कुछ ने खांदी ओ फरीद मां नहीं मांस नहीं, नहीं खांदी है ਵਾਤਾ ਕੋ ਲੋ ਖਾਂਦਾ ਕਾਗਾ ਕਰਗਟਾ ਢੋਲਿਆ ਅਗਲਾ ਖਾਇਆ ਬਾਸ ਉਹ ਵਾਸਤਾ ਮਨਮੁਖਤਾ ਨੇ ਖਾਦਾ ਸੀ ਬੜੀ ਕਹਾਵਾਲੀ ਮਤ ਸੀ ਨਾ ਪਹਿਲੀ ਮਨਮਤ ਉਹਨੇ ਖਾ ਗਈ ਸੀ ਬਾਸ ਇਹ ਕਾਨੂੰ ਖਾਂਦੀ ਐ ਸੱਚੇ ਨਾਮ ਦੀ ਭੁੱਖ ਨਹੀਂ ਖਾਂਦੀ ਉਹ ਪਹਿਲਾਂ ਦਾ ਕਰਮਾਂ ਵਾਸਤਾ ਦੀ ਗੱਲ ਸੀ ਉਹਦੇ ਕੋਲ ਪਵਦਾਨੀ ਕੀ ਕਰਾਮਾਤ ਹੋ ਜਾਂਦੀ ਆ ਜਾਂਦੀ ਆਦਮੀ ਦੇ ਵਿੱਚ ਜੇ ਕੇ ਸਾਨੂੰ ਸਿੱਧੇ ਪ੍ਰਾਪਤ ਹੋ ਜਾਂਦੀ ਆ ਉਹ ਜੇ ਕਰਾਮਾਤ ਆ ਕਰਾਮਾਤਾਂ ਹੀ ਹੁਣ ਸਾਡੇ ਕੋਲ ਸੁਣੀ ਹੋਈਆਂ ਨੇ ਕਰਾਮਾਤਾਂ ਹੁੰਦੀਆਂ ਨੇ ਕਰਾਮਾਤਾਂ ਦਾ ਪ੍ਰਚਾਰ ਹੈ ਮਨਮਤਾਂ ਦਾ ਗੁਰਬਾਣੀ ਕਰਾਮਾਤ ਨੂੰ ਮੰਦੀ ਹੈ ਅਬੇ ਯਾ ਪ੍ਰੋਫੈਸਰ ਦਾ ਕਰਾਮਾਤ ਦਾ ਤਾ ਅਜੀ ਉਹਦਾ ਸ਼ਰੀਕ ਹੋਣਾ ਉਹਦੀ ਕਰਾਮਾਤ ਰੋਕਣੀ ਏ ਅਜੀ ਉਹਦੇ ਨਾਲ ਲੜਾਈ ਕਰਨੀ ਏ ਇਹ ਤਾਂ ਛੱਡ ਜਾਣਾ ਉਹਨੇ ਆਪਣੀ ਕਰਾਮਾਤ ਨਾਲ ਸਾਨੂੰ ਬਚਾਉਣਾ ਕਾਲ ਤੋਂ ਕਾਲ ਤੋਂ ਉਹਨੇ ਆਪਣੇ ਕਰਾਮਾਤ ਨਾਲ ਬਚਾਉਣਾ ਜੇ ਉਹ ਛੱਡ ਜਾਣਾ ਤਾਂ ਉਹ ਕਰਾਮਾਤ ਨਾਲ ਹੀ ਉਹਦਾ ਡਰੇ ਉਹਦੀ ਕਰਾਮਾਤ ਐਸੀ ਐ ਕਾਲ ਦਾ ਵਾਰ ਉਸ ਰੀਅਲ ਚ ਨਹੀਂ ਹੁੰਦਾ ਬਸ ਦੁੱਖ ਗਲੇਸ ਕੁਝ ਨਹੀਂ ਹੁੰਦਾ ਇਹ ਕਰਾਮਾਤ ਹੈ ਉਹ ਭੁੱਖੇ ਖਾਏ ਚਲੀਏ ਦੂ ਕਰਾਮਾਤ ਹੈ ਮੁਰਕੀ ਹੈ ਉਸ ਭੁੱਖ ਦੇ ਖਾਦੇ ਦੁੱਖ ਦਾਰੇ ਦੂਰ ਹੋ ਜਾਂਦੇ ਨੇ ਇਹ ਕਰਾਮਾਤ ਹੈ ਉਹ ਭੁੱਖ ਜੇ ਨਹੀਂ ਕਰਾਮਾਤ ਆ ਉਹਦੇ ਕੀ ਹੋਊ ਪਦਾਰਥ ਵਿੱਚ ਕੀ ਕਰਾਮਾਤ ਆਉ ਸੰਸਾਰੀ ਦੁੱਖ ਤਾਂ ਉਹਦੀ ਭੁੱਖੇ ਖਾ ਜਾਂਦੀ ਹੈ ਇੱਛਾ ਹੀ ਪੈਦਾ ਹੋਈ ਹੈ ਇੱਛਾ ਹੀ ਸੰਸਾਰੀ ਦੁੱਖ ਆਗੀ ਆਪ ਕੀ ਕੀ ਘਾਉ ਜੇ ਦਰਖਤ ਦੀ ਛਾਉਂ ਦੇ ਵਿੱਚ ਇੰਨੀ ਕਰਾਮਾਤ ਹੈ ਦਰਖਤ ਚ ਕੀ ਕਰਾਮਾਤ ਹੋ ਕਹਦੇ ਫਲਾਣਾ ਦਰਖਤ ਦੀ ਛਾਂ ਚ ਬਹਿ ਜੀਏ ਫਲਾਣਾ ਰੋਗ ਦੂਰ ਹੋ ਜਾਂਦਾ ਉਹਦੀ ਛਾਉਂ ਜੇ ਰੋਗ ਦੂਰ ਹੋ ਜਾਂਦਾ ਜੇ ਨਿੰਮ ਘਰ ਜਿਓਵੇ ਛਾਂ ਬਹਿ ਜੀਏ ਤਾਂ ਘੜੀਆਂ ਵਗਾਰਾ ਕਈ ਲੋਕ ਨਹੀਂ ਹੁੰਦੇ ਉਕੇ ਕਹਿੰਦੇ ਸੀ ਜਮ ਇਲਟੇ ਬਾਟੇ ਕੋ ਹੁੰਦੀ ਵਾਈ ਦੇ ਵਾਇਰੇ ਰੋਗ ਨਹੀਂ ਹੁੰਦੇ ਤੇ ਨਿਮ ਦੇ ਖਾਣ ਨਾਲ ਤਾਂ ਹੋਰ ਵੀ ਚੰਗੀ ਗੱਲ ਹੈ ਨਾ ਨਿਮਰੇ ਵਿੱਚ ਵਰਤਲ ਦੇ ਵਿੱਚ ਤਾਂ ਹੋਰ ਵੀ ਜ਼ਿਆਦਾ ਕਰਾਮਾਤ ਹੈ ਨਾ ਜੇ ਉਹਦੀ ਭੁੱਖੇ ਸਾਰੇ ਦੁੱਖ ਖਾ ਜਾਂਦੀ ਹੈ ਆਪ ਕੀ ਕਰਦਾ ਹੋ ਆਪ ਕੀ ਕਰਦਾ ਆਪ ਤੌ ਦਾ ਜੇ ਸਪਰਸ਼ ਉਹਨਾਂ ਦਰਸ਼ਨ ਪਰਸੀਏ ਗੁਰੂ ਕੇ ਜਨਮ ਵਰਣ ਦੁਖ ਜਾਏ ਆ ਬਾਗਰਾ ਬਾਤ ਉਹਦੀ ਕੀ ਕਰਾਮਾਤ ਹੈ ਦਰਸ਼ਨ ਪਰਸੀਏ ਗੁਰੂ ਕੇ ਜਨਮ ਵਰਣ ਦੁਖ ਜਾਏ ਦਰਸ਼ਨ ਨਾਲ ਹੀ ਜਨਮ ਵਰਣ ਦਾ ਦੁਖ ਟੈ ਇਹ ਉਹਦੀ ਕਰਾਮਾਤ ਹੈ ਮੈਂ ਦਰਸ਼ਨ ਦਰਸ਼ਨ ਲਾਉਣ ਹੁਣ ਗੁਰੂ ਦੇ ਵਿੱਚ ਜਿਹਨੂੰ ਗੁਰੂ ਕੇ ਗੁਰਬਾਣੀ ਚ ਉਦੇ ਦਰਸ਼ਨ ਨਾਲ ਜਨਮ ਮਰਨ ਦਾ ਦੁੱਖ ਕਟਿਆ ਜਾਂਦਾ ਹੈ। ਵਿਅਕਤੀ ਐਸਾ ਨਹੀਂ ਕੋਈ ਹੋਇਆ ਨਾ ਹੋ ਸਕਦਾ ਹੈ ਨਾ ਹੋਊਗਾ ਜਿਹਦੇ ਮੈਂ ਦਰਸ਼ਨ ਨਾਲ ਜਨਮ ਮਰਨ ਦਾ ਦੁੱਖ ਕਟਿਆ ਜਾਵੇ। ਧਿਆਨ ਰੱਖਣ ਵਾਲੀ ਗੱਲ ਇਹ ਜੇ ਅਸੀਂ ਕੋਈ ਇੱਕ ਬੰਦੇ ਨਾਲ ਕਿਸੇ ਬੰਦੇ ਨੂੰ ਗੁਰੂ ਬਹੁਤ ਬੜੀ ਬਲੰਡਰ ਮਿਸਟੇਕ ਕਰਦੇ ਹਾਂ ਅਸੀਂ। ਵੱਡੇ ਮੂਰਖ। ਕਿਸੇ बंदे ਦੇ ਦਰਸ਼ਨ ਨਾਲ ਜਨਮ ਮਰ ਦਾ ਦੁੱਖ ਟੈ ਜਾਵੇ ਨਹੀਂ ਹੋ सारी ਇਹ तो ਸਾਰੀ ਗੁਰਮਤ ਤੋਂ ਹੀ ਖਿਲਾਫ ਹੈ ਗੱਲ ਗੁਰਬਾਣੀ ਤੋਂ ਖਿਲਾਫ ਹੈ ਮੇਰ ਤਾਂ ਫਿਰ ਤਾਂ ਮੂਰਤੀ ਪੂਜਾ ਵਾਲੇ ਸਹੀ ਨੇ ਫਿਰ ਤਾਂ ਮੂਰਤੀ ਪੂਜਾ ਵਾਲੇ ਸਹੀ ਨੇ ਬੜੀ ਸਾਜ਼ਿਸ਼ ਨਾਲ ਇਹ ਗੱਲ ਸਾਡੇ ਅੰਦਰ ਕਹਤੇ ਗੁਰੂ ਆਦਮੀ ਸੰਸਾਰ ਚ ਹੁੰਦਾ ਕੋਈ ਗੁਰੂ ਹੋ ਸਕਦਾ ਹੈ ਗੁਰਬਾਣੀ ਇਸ ਗੱਲ ਤੇ ਹੀ ਖਲਾਫ ਵਾਮਨਾਪ ਗੁਰੂ ਬਣਿਆ ਹੋਇਆ ਹੈ ਗੁਰੂ ਬਣਿਆ ਹੋਇਆ ਆਲਰੇਡੀ ਗੁਰੂ ਹੈਗੇ ਨੇ ਭਗਤੇ ਦੇ ਖਲਾਫ ਭਗਤ ਕਹਿੰਦੇ ਦਾਸ ਗੁਰੂ ਪਰਮੇਸ਼ਰ ਇਹ ਗੱਲ ਦਾ ਤਾਂ ਰੌਲਾ ਹੀ ਆ ਭਗਤਾਂ ਦਾ ਰੋ ਲੋਕਲ ਗੁਰੂਆਂ ਦਾ ਜਿੰਨੀਆਂ ਵੀ ਮੱਤਾਂ ਨੇ ਇਸ ਬੋਣ ਦਾ ਹੀ ਰੌਲਾ ਹੈ ਭਗਤਾਂ ਦਾ ਉਹ ਕਹਿੰਦੇ ਨੇ ਆਦਮੀ ਗੁਰੂ ਦਾ ਨਹੀਂ ਉਹ ਕਹਿੰਦੇ ਆਦਮੀ ਗੁਰੂ ਹੁੰਦਾ ਅੱਜ ਅਸੀਂ ਮੰਡੀ ਬੈਠੇ ਗੁਰੂ ਹੈਗੇ ਤੇ ਭੇ ਘਰ ਮਤ ਸਾਡੇ ਕਿੱਥੋਂ ਰਹਿਣੀ ਸੀ ਨਾਮ ਕਿੱਥੋਂ ਰਹਿਣਾ ਸੀ ਸੋਝੀ ਕਿੱਥੋਂ ਰਹਿਣੀ ਸੀ ਕਰੈਕਟਰ ਕਿੱਥੋਂ ਰਹਿਣਾ ਸੀ ਸਭ ਕੁਝ ਹੋ ਗਿਆ ਜਿਹੜਾ ਹਿੰਦੂਆਲਾ ਹੋ ਜੇ ਸੀ ਹੋ ਗਿਆ ਇਹ ਲੜਾਈ ਸਾਡੇ ਨੂੰ ਘਟਾ ਐ ਇੰਨੀ ਗੈਰਫਰਕ। ਆ ਲੜਾਈ ਝਗੜਾ ਉਹਨੇ ਜੇ ਘਟਾ ਸਾਡੇ ਨੂੰ। ਇੰਨੀ ਉਹਦੇ ਚ ਕਮਜ਼ੋਰੀ ਆ ਵੀ ਸਾਡਾ ਨੂੰ ਲੜਾਈ ਝਗੜਾ ਘਟਾ। ਇਹ ਸਾਡੇ ਕੋ ਵੱਧ। ਬਾਕੀ ਬਤਾ ਜੇ ਨਾ ਲੜਾਈ ਝਗੜਾ ਨਹੀਂ ਇਹਨਾਂ ਸੱਖਾਂ ਚ। ਇਹ ਸਾਡੇ ਸਾਡੇ ਕੋ ਫਾਲਤੂ ਆ। ਕੋਈ ਯਾਦ ਕੋ ਕੀ ਦੰਗਾ ਪੁੱਠੀਆਂ ਮੱਤ ਤਾਂ ਲੈ ਲਈ। ਪੁੱਠੀਆਂ ਵਕ ਲੈ ਲਈ ਜਿਹੜੀ ਸਿੱਧੀ ਦੀ ਉਹ ਛੜਤੀ। ਜੁੜੀ ਗੱਲ ਜਿਹੜਾ ਪਿੱਛੇ ਨੂੰ ਮੁੜਦਾ ਪੁੱਠੇ ਪਾਸੇ ਨੂੰ ਜਾਂਦਾ ਪੁੱਠੇ ਪਾਸੇ ਵਾਲੀ ਇੰਚੀ ਚੁੱਕ ਲੈਂਦਾ ਸਿੱਧੇ ਪਾਸੇ ਵਾਲਾ ਸਿੱਧੇ ਪਾਸੇ ਵਾਲੀ ਇੰਚੀ ਚੁੱਕ ਲੈਂਦਾ ਭੁੱਖੇ ਖਾਏ ਚੱਲੀਏ ਦੂਖ ਉਹ ਭੁੱਖੇ ਖਾਏ ਚੱਲੀਏ ਦੂਖ ਸੋ ਕਿਉਂ ਵਿਸਰਾਏ ਮੇਰੀ ਮਾਏ ਹਾਂ ਮੇਰੀ ਮਾਏ ਮਾਤ ਨੂੰ ਕਹਿੰਦੇ ਨੇ ਆਪਣੀ ਬੁੱਧੀ ਨੂੰ ਕਹਿੰਦੇ ਨੇ ਆਪਣੀ ਫੇਰ ਉਹੀ ਤੇ ਕਿਉਂ ਮਿਲਸਰਦੀ ਹੈ ਐਸੀ ਚੀਜ਼ ਬਸ ਤੂੰ ਕਿਉਂ ਮਿਲਸਰ ਗਿਆ ਆਦਮੀ ਨੂੰ ਬਾਈ ਜੀ ਦੇ ਭੁਖਰੇ ਵਾਲੇ ਸਾਰੇ ਦੁੱਖ ਦੂਰ ਹੋ ਜਾਂਦੇ ਨੇ ਆਂ ਵੀ ਕੋਈ ਨਹੀਂ ਕਿਹਾ ਨਾ ਮੈਨੂੰ ਸੰਸਾਰ 'ਚ ਕੋਈ ਦੁੱਖ ਹੋਵੇ ਸਾਰੀ ਲੜਾਈ ਆਦਮੀ ਦੀ ਜੋ ਸਜੂਹੀ ਦੁੱਖਾਂ ਦੇ ਖਿਲਾਫ ਹੈ ਸਾਰੀ ਜ਼ਿੰਦਗੀ ਆਦਮੀ ਕੀ ਕਰਦਾ ਆਪਣੇ ਦੁੱਖਾਂ ਨੂੰ ਸੁੱਖਾਂ 'ਚ ਬਦਲ ਦੇਦੀ ਉਹ ਸਾਰੀ ਉਮਰ ਲੱਗ ਜਾਂਦੀ ਹੈ ਕੋਈ ਦੁੱਖ ਨਾ ਹੋਵੇ ਮੈਨੂੰ ਨਾ ਹੋਵੇ ਮੇਰੇ ਕਿਸੇ ਰਿਸ਼ਤੇਦਾਰ ਨੂੰ ਨਾ ਹੋਵੇ ਕਿ ਪੁੱਤ-ਪੋਤੇ ਨੂੰ ਨਾ ਹੋਵੇ ਇਹ ਤਾਂ ਲੜਾਈ ਐ ਸਤਿ ਸਾਰ ਦੀ ਲੜਾਈ ਕੀ ਹੈ ਮੇਰੇ ਦੇਸ਼ ਦੇ ਬੰਦੇ ਨੂੰ ਨਾ ਹੋਵੇ ਮੇਰੇ ਬਾੜ ਦੇ ਬੰਦੇ ਨੂੰ ਨਾ ਹੋਵੇ ਦੇਖੋ ਜਿਵੇਂ ਜਿਵੇਂ ਕੋਈ ਲੀਡਰ ਹੈ ਇਹ ਤਾਂ ਲੜਾਈ ਲੈਸ ਸਤਿ ਸਾਰ ਹੋਰ ਕੀ ਕਰ ਲੈ ਮੇਰੇ ਨਾਲ ਦੇਸ਼ ਦੇ ਬੰਦੇ ਸੁਖੀ ਬਸਣ ਜੇ ਇਮਾਨਦਾਰ ਹੈ ਉਹ ਵਧੜੀ ਨਾਲ ਗੱਲ ਕਰਦਾ ਲੀਡਰ ਕਹਿੰਦਾ ਤਾਂ ਹੈਗਾ ਹੀ ਨਹੀਂ ਕਿ ਆਇਆ ਅੰਦਰੋਂ ਕਿਵੇਂ ਹੋਣ ਇਹ ਤਾਂ ਸਾਰਾ ਸੰਸਾਰ ਦੀ ਲੜਾਈ ਹੈ ਫਿਰ ਪਰ ਜਿਹਦਾ ਹੱਲ ਬੈ ਨਹੀਂ ਜੀ ਗੱਲ ਦੇ ਵਿੱਚ ਹੈ ਸੱਚੇ ਨਾਮ ਦੀ ਭੁੱਖ ਦੇ ਵਿੱਚ ਦੁੱਖ ਜਾਂਦੇ ਨੇ ਫਿਰ ਇਹਦਾ ਇਦੋਂ ਤਾਂ ਸੌਖਾ ਹੋਰ ਕੋਈ ਸੋ ਕਿਉਂ ਬਿਸਰਿਆ ਮੇਰੀ ਮਾਏ ਫੇਰ ਉਹਨੂੰ ਵਿਸਰਨਾ ਕੀ ਕਾਇਦੀ ਹੈ ਬਸ ਗੱਲ ਲਏ ਮਾਇਆ ਧਾਰੀ ਦਾ ਧਿਆਨ ਉਧਰ ਨਹੀਂ ਜਾਣਾ ਮਾਇਆ ਧਾਰੀ ਦਾ ਧਿਆਨ ਦੂਏ ਪਾਸੇ ਜਾਦਾ ਮਾਇਆ ਧਿਆਨ ਉਹ ਆਪਣੀ ਹੋਮੇ ਨਾਲ ਦੁਖਦੂਰ ਕਰਦਾ ਸੋ ਕਿਉਂ ਬਿਸਰਿਆ ਮੇਰੀ ਮਾਏ ਸਾਹਿਬ ਸੱਚਾ ਤੈਨੂੰ ਕਿਉਂ ਵਿਸਰਦਾ ਸੰਸਾਰ ਨੂੰ ਵਿਸਰਿਆ ਆਇਆ ਖਾਵੇ ਖਤਵੇ ਨੂੰ ਸੰਸਾਰ ਤੂ 에ਰਾ ਆਪਣਾ ਸੱਚੇ ਨਾਮ ਦੀ ਭੁੱਖ ਮੈਗਾ ਕਰਕੇ ਆਪਣੇ ਦੁੱਖ ਦੂਰ ਕਰ ਲੈ ਸੰਸਾਰ ਐ ਹੰਕਾਰੀਆਂ ਦਾ ਹੋਮੇ ਵਾਲਿਆਂ ਦੇ ਦੁੱਖ ਉਹ ਆਪਣੀ ਤਾਕਤ ਨਾਲ ਕਰਦੇ ਨੇ ਦੂਰ ਬਾਇਆ ਰੋੜ ਬਾਇਆ داری ਮਾਇਆ ਨਾਲ ਦੁੱਖ ਦੂਰ ਕਰਦੇ ਨੇ ਨਿਰੰਕਾਰ ਦੇ ਨਾਮ ਨਾਲ ਉਹਦੇ ਬਾਣੀ ਚ ਰਹਿ ਕੇ ਦੁੱਖ ਦੂਰ ਕਰਦੇ ਨੇ ਔਰ ਉਹ ਜਾਣਦੇ ਨੇ ਭਗਤ ਜਾਣਦੇ ਨੇ ਗੁਰੂ ਕਾ ਜਾਣਦੇ ਨੇ ਨਾਲ ਕ ਚਿੰਤਾ ਮਟ ਕਰੋ ਚਿੰਤਾ ਤੇ ਸਹੀ ਉਹਨਾਂ ਨੂੰ ਦੀਦਾਰਾ ਚਿੰਤਾ ਕਰਦਾ ਸਾਰਿਆਂ ਦੀ ਉਹ ਦੂਜਿਆਂ ਨੂੰ ਦੀਦਾਰੀ ਨਹੀਂ 몰ਿਆ ਨੂੰ ਉਸ ਇੰਨਾ ਫਰਕ ਵੀ ਹੈ ਭਗਤਾਂ ਨੂੰ ਦੀਦਾਰ ਇਹ ਆ ਜਿਹੜੇ ਭਗਤਾਂ ਦੇ ਵਿਸ਼ਵਾਸ ਕਰਦੇ ਨੇ ਕੁਰਬਾਨੀ ਤੇ ਭਰੋਸਾ ਕਰਦੇ ਨੇ ਭਰੋਸਾ ਕਰਦੇ ਨੇ ਸ਼ਰਦਾ ਨਹੀਂ ਉਹਨਾਂ ਨੂੰ ਜੈ ਨਹੀਂ ਦੀ ਦਾ ਭਰੋਸਾ ਕਰ ਲੈਂਦੇ ਨੇ ਉਹਨਾਂ ਦੇ ਵੀ ਦੁੱਖ ਦੂਰ ਹੋ ਜਾਂਦੇ ਨੇ ਗਾਲ ਨਹੀਂ ਜਾਂਦਾ ਕਹਾਂ ਜਾ ਕੇ ਭਰੋਸਾ ਕਰਕੇ ਚੱਲੀ ਜਾਂਦੇ ਨੇ ਪਹੁੰਚ ਜਾਂਦੇ ਨੇ ਸੱਚਾ ਸਾਹਿਬ ਸੱਚਾ ਨਾਏ ਸੱਚਾ ਸਾਹਿਬ ਸੱਚੇ ਨਾਏ ਕਿਉਂਕਿ ਸਹਿਬ ਜਿਹੜਾ ਹੈ ਸੱਚਾ ਸਤ ਸਰੂਪ ਸਹਿਬ ਸਦਾ ਸਦਾ ਰਹਿੰਦਾ ਸੱਚਾ ਕੋਲ ਹੁੰਦਾ ਗਲਤ رائے ਨਹੀਂ ਦਿੰਦਾ ਝੂਠ ਨਹੀਂ ਬੋਲਦਾ ਸਵਾਰਥ ਨਹੀਂ ਜਿਹਦੇ ਵਿੱਚ ਹੈ ਸਵਾਰਥ ਹੈ ਹੀ ਨਹੀਂ ਸਵਾਰਥ ਨਹੀਂ ਜਿਹਦੇ ਵਿੱਚ ਉਹ ਸੱਚ ਹੈ ਸੱਚ ਜਿਹੜੀ رائے ਹੈ ਨਾ ਜਿਹੜੀ ਸਲਾਹ ਦਿੰਦਾ ਸਾਨੂੰ ਗਿਆਨ ਦਿੰਦਾ ਨਾਏ ਉਹਦੀ ਸਾਡੀ ਸਲਾਹ ਵੀ ਸੱਚੀ ਹੁੰਦੀ ਹੈ ਜੋ ਸੱਚੀ ਉਹ ਸਲਾਹ ਦਊ ਠੀਕ ਸਲਾਹ ਦਊ ਗਲਤ ਸਲਾਹ ਨਹੀਂ ਦਿੰਦਾ ਤੁਹਾਨੂੰ ਗਿਆਨ ਵੀ ਸਲਾਹ ਹੁੰਦੀ ਹੈ ਸਭ ਤੁਸਲਾਹ ਕੇ ਆਏ ਨਾ ਨਾਲ ਮਸ਼ਵਰਾ ਹੀ ਐ ਗਿਆਨ ਆਪਾਂ ਕਿਸੇ ਤੋਂ ਕੋਈ ਮਸ਼ਵਰਾ ਲੈਣ ਜਾਂਦੇ ਹੋ ਗਿਆਨ ਲੈਣ ਜਾਂਦੇ ਆਪਾਂ ਕਹਿੰਦੇ ਫਲਾਨੇ ਦਾ ਸਲਾਹ ਕਰਕੇ ਆਏ ਮਸ਼ਵਰਾ ਕਰਕੇ ਆਏ ਗਿਆਨ ਇਹ ਦਿੱਤਾ ਉਹ ਵੀ ਐਂ ਦੀ ਭਾਈ ਐ ਕਰ ਲੈ ਕੋਦੋਂ ਐਂ ਦੀ ਐ ਠੀਕ ਐ ਸਾਚਾ ਜਿਹੜਾ ਸਾਹਿਬ ਹੈ ਸਚਨ ਆਏ ਉਹ ਸੱਚੀ ਹਸਲਾਤ ਹੁੰਦਾ ਹੈ ਠੀਕ ਸਾਥ ਹੁੰਦਾ ਹੈ ਗਲਤ ਸਾਥ ਨਹੀਂ ਦਿੰਦਾ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਬਸ ਜਿੰਨਾ ਵੀ ਅਸੀਂ ਵਡਿਆਈ ਕੀਤੀ ਹੈ ਲੋਕਾਂ ਨੇ ਸਚੇ ਨਾਮ ਦੀ ਉਹ ਬਹੁਤ ਥੋੜੀ ਜੀ ਕੀਤੀ ਹੈ ਕਿਉਂ ਤਿਲਕ ਜੀ ਵਡਿਆਈ ਕੀਤੀ ਕਿਉਂ ਅਸੀਂ ਬਹੁਤ ਥੋੜੇ ਏਰੀਆ ਚ ਰਹਿੰਦੇ ਹਾਂ ਥੋੜੇ ਏਰੀਏ ਚ ਘੁੰਮਦੇ ਤੇ ਉਹਦੀ ਦਾ ਰਚਨਾ ਬਹੁਤ ਵੱਡੀ ਹੈ ਪਤਾ ਨਹੀਂ ਕਿੰਨੀ ਘੋਰ ਧਰਤੀ ਉਨੇ ਦੇ ਤੇ ਜੀ ਜੰਦਾ ਹੈ ਜੀਵਨ ਸਾਰਿਆਂ ਦੀ ਬਲਣਾ ਕਰਦਾ ਸਾਰੀ ਉਹਨੇ ਤਾਂ ਪੈਦਾ ਕੀਤੇ ਨੇ ਸਾਰਿਆਂ ਦੇ ਦੁੱਖ ਦੂਰ ਕਰਦਾ ਅਜੀਤਾ ਆਪਣੇ ਨਾਲ ਲੈਟਰ ਜਿੰਨੀ ਗਏ ਨਾ ਵਧਾਈ ਜਿੰਨੀ ਸਾਨੂੰ ਮਹਿਸੂਸ ਹੋਈ ਓਨੀ ਗੱ ਕੀਤੀ ਉਹਦੀ ਸਿਰਫ ਇੱਕ ਆਦਮੀ ਆਦਮੀ ਨਾਲ ਰਿਲੇਟਡ ਜਿਹੜੀ ਗੱਲ ਹੈ ਪਜੂ ਪੰਛੀ ਦੇ ਬਿਰਖੜੇ ਸਤਾਵਨ ਨੇ ਇਹ ਜੂਨਾ ਨੇ ਸਭ ਦਾ ਇਹਨੂੰ ਬਕਰ ਹੈ ਪਾਗਲ ਤਾਂ ਸਿਰਫ ਆਪਣੀ ਆਪਣੀ ਗੱਲ ਕਰਦਾ ਜਿਹੜੀ ਮੇਰੇ ਨਾਲ ਹੈ ਜਿਹੜੀ ਉਹਨੂੰ ਮਹਿਸੂਸ ਹੋਈ ਹੈ ਸੁੱਖ ਦੁੱਖ ਦਾ ਸੁੱਖ ਦੁੱਖ ਦਾ ਕੀ ਪਤਾ ਦੁਹੇ ਨੂੰ ਦੁਹੇ ਦਾ ਕੀ ਪਤਾ ਪਾਗਲ ਸਿਰਫ ਆਪਣੀ ਗੱਲ ਕਰਦਾ ਆਤਮ